ਸੋ ਲੋਕ ਮਹੱਲਾ ਪੰਜਵਾਂ ਰਾਜਨ ਤੇਰੀ ਕਰਨ ਕੀ ਹੋਏ ਰਹਾ ਸਦ ਧੂਰ ਨਾਨਕ ਸ਼ਰਨ ਤੁਮਾਰੀਆ ਵੇਖੋ ਸਦਾ ਹਜ਼ੂਰ ਮੱਦੇ ਦੇ ਚਰਨਾਂ ਦੀ ਸਦਾ ਧੂੜ ਹੋ ਕੇ ਰਹੋ ਚਰਨਾਂ ਦੇ ਧੂੜ ਕੀ ਹੁੰਦੀ ਜਿਵੇਂ ਹੁੰਦੀ ਚਲਣੇ ਕੌਣ ਕੌਣ ਜਾਂਦੇ ਨੇ ਤੋਂ ਵਿੱਚੋਂ ਗਿਆਨ ਪ੍ਰਗਟ ਹੋਦਾ ਕੋਲ ਗਿਆਨ ਪ੍ਰਾਪਤ ਹੋਏ ਜਿਵੇਂ ਘੋੜੇ ਭਾਈ ਜੇ ਨੇ ਜੀਤ ਚ ਧੂੜ ਪੈਦਾ ਹੁੰਦੀ ਆ ਜਿਵੇਂ ਜਦ ਬਾਦ ਅੱਤੇ ਤੇ ਨੂੰ ਡੜਕਦੇ ਨੇ ਗੁਣਾ ਵਿੱਚੋਂ ਗਿਆਨ ਪੈਦਾ ਹੁੰਦਾ ਉਹ ਗਿਆਨ ਤੇ ਧੂੜ ਤੇਰੇ ਕਿੰਨ ਦੀ ਵਿਚਾਰ ਕਰਦੀ ਰਹੋ ਕਿਤੇ ਬੋਲਦੀ ਹੈ ਸਾਜਿਤ ਜਿੱਤ ਹੈ ਅੱਛਾ ਜੀ ਉਹਦੇ ਕੋ ਗੁਣਾ ਗੁਣਾ ਹੁਣ ਉੱਪਰ ਛੱਟੇ ਨਾ ਹੁਣ ਅਗੋਂ ਰਹੇ ਦੀ ਮਾਨਾ ਗੁਣਾ ਵਾਲਾ ਦੀ ਨਾ ਰਹਾ ਹੁਣ ਹੋ ਤੀਸ਼ਰ ਗਦਲੀ ਹੋਈ ਹੈ ਹੁਣ ਇੱਕ ਹੈ ਇੱਕ ਵਾਂ ਇੱਕ ਜਿੱਤ ਹੁਣ ਉਹਨੂੰ ਸਾਜਿਤ ਕਿ ਹੈ ਪਹਿਲਾਂ ਤਾਂ ਵਾਣ ਵਾਲੇ ਜਿਆਨ ਨਾਲ ਤਿਆਰ ਨੂੰ ਜਿਆਨ ਕਹਿ ਕੇ ਤਾਂ ਖੇਡ ਆਈ ਹੈ ਹੁਣ ਤੱਕ ਅੱਖੀ ਘਟਾ ਬਾਤਾਂ ਲੋਕਾਂ ਨੇ ਕਿਹ ਨਹੀਂ ਜਬੂ ਕੀ ਖੇਡ ਜਬੂ ਰੇਲਵੇ ਲੈ ਜਾਂਦਾ ਪਤਾ ਹੀ ਨਹੀਂ ਕਿੱਥੇ ਹੈ ਰੇਲਵੇ ਲੈ ਜਗਤ ਹੈ ਉਹ ਵਿਚਾਰ ਫੁੱਟ ਦੁੱਪੇ ਖੇ ਹੁੰਦੇ ਜਿਹੜੀ ਉਹ 4 ਫੁੱਟ ਲਗ ਲੋਤ ਸਰਾ ਸਹੇੜਾ ਗੁਰਮਤ ਦੇ ਕਿਹੜਾ ਇਹ ਇਹ ਇੱਕ ਕਾਲਨ ਜਾਗਦੇ ਚਿੱਤਰ ਬੁੱਲਦੇ ਦੁਹਾਂ ਤੇ ਫੈਲਦੀ ਰਹੇ ਹੁਣ ਰਹੇ ਹੂੰ ਕਾਲਨ ਦਾ ਮਤਲਬ ਹੁੰਦਾ ਐਸਾ ਪਾਠ ਇੱਛਾ ਠੀਕ ਹੈ ਜੀ ਮਨ ਗੁਰੂ ਸਾਜਣਤਾ ਇੱਛਾ ਅਸਾ ਗਿਆਨਤਾ ਇੱਛਾ ਕੋਈ ਪਾਠ ਗਿਆਨ ਦਿੰਦਾ ਤੈਨੂੰ ਐਸੀ ਚੀਜ਼ ਨਹੀਂ ਇੱਕ ਵਾਰ ਬੇਮਹੂਰ ਬੋਲਣਾ ਹੈ ਪੜਾਇਆ ਜਾਂਦਾ ਗਿਆਨ ਹੱਕੇ ਸਵਾ ਗਿਆਨ ਭਾਈ ਪਾਠੇ ਪੜਾਇਆ ਜਾਂਦਾ ਥੋੜਾ ਥੋੜਾ ਕਰ ਤੇ ਉਹ ਉਹਨੂੰ ਚਾਰਨ ਨੇ ਸਾਜਨ ਤੇਰੇ ਚੜਨ ਕੀ ਜਿਵੇਂ ਜਿਰ ਪਾਓ ਇੱਕ ਚੜਨ ਹੈ ਜਰਵਾਡ ਅਕਾਲ ਮੂਰ ਇੱਕ ਚੜਨ ਅਯੋਧੀ ਇੱਕ ਚੜਨ ਦਾਤਾ ਇੱਕ ਚੜਨ ਕਿਆਲ ਸਾਰੇ ਗੁਰੂਆਂ ਦੇ ਗਿਆਨ ਦੇ ਉਹ ਚਲਣਾ ਦਾ ਬਣਿਆ ਫਿਰ ਸ਼ਰਨ ਤੁਹਾਰੀਆਂ ਵੇਖੋ ਤੇਰੀ ਸ਼ਰਨ ਲਾ ਫਿਰ ਹੋਏ ਸਭ ਧੂੜ ਦੇ ਦੀ ਧੂੜ ਦੇ ਵਿੱਚੇ ਰਹਿਣਾ ਹੈ ਸ਼ਰਨ ਤੇਰੀ ਤੇ ਹੈ ਮੈਂ ਤੇਰੀ ਸ਼ਰਨ ਵਿੱਚ ਹਾਂ ਨਾਨਕ ਤੇ ਸ਼ਰਨ ਤੁਹਾਰੀਆਂ ਨਾਨਕ ਕਹਿੰਦਾ ਮੈਂ ਤੇਰੀ ਸ਼ਰਨ ਵਿੱਚ ਹੋਵਾਂ ਦੇਸ਼ ਕਰਦੇ ਕੋ ਸਦਾ ਹਜ਼ੂਰ ਮੈ ਉਹ ਹਰ ਵਕਤ ਹਾਜ਼ਰ ਨਾਜ਼ਰ ਕੇ ਕੇ ਗੱਲ ਨੂੰ ਪਲਟ ਕੇ ਕਿਹਾ ਸੀ ਪਰ ਕੇ ਹਰਪੂਰਨ ਬੰਵਾਸ ਕੀਓ ਉਹ ਨਾਨਕ ਨੂੰ ਪ੍ਰਤਖ ਸੀ ਨਾਨਕ ਸਦਾ ਹਜ਼ੂਰ ਹਰ ਦੇ ਗੁਰਪ੍ਰਤਿ ਪਾਸ਼ਾ ਸਦਾ ਹਜ਼ੂਰ ਹਰ ਦੇ ਸਦਾ ਹਜ਼ੂਰ ਜੂਰ ਜਿਹੜਾ ਸ਼ਾਲਮ ਵਿੱਚ ਚਲਾ ਜਾਂਦਾ ਉਹ ਹਰ ਵਕਤ ਹਜ਼ੂਰ ਹੂਜੇ ਵਾਸਤੇ ਹਾਜ਼ਰ ਹਜ਼ੂਰ ਹੈ ਚਾਰਾ ਜੂਰ ਹੈ ਗਿਆਨ ਦੇ ਵਾਸਤੇ ਸੁਪਾ ਹੈ ਠੀਕ ਹੈ ਜੀ ਮਹੱਲਾ ਪੰਜਵਾਂ ਅਸੰਖ ਹੋਏ ਹਰ ਮਨ ਲਾਗ 68 ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ ਚੁੱਧ ਮਾਰੇ ਚੱਕ ਕੇ ਤਨ ਹੁਣਾਂ ਉੱਤੇ ਵੀ ਛਿੱਕਾਂ ਮਾਰਦਾ ਅੱਛਾ ਜੀ ਫਤ ਤੋਪਨੀਕ ਕਰਤਾ ਸੱਦਾ ਹੀ ਪਵਿੱਤਰ ਰਹਿਣੇ ਨਹੀਂ ਦਿੱਤਾ ਵਿੱਚ ਪਵਿੱਤਰ ਆਣਿਆ ਤਿੰਨ ਬੌਲੀਆਂ ਮਾਰਿਆ ਬਾਹਰ ਮਾਰਿਆ ਤੇ ਕੋਈ ਕਰਤਾ ਫਤ ਤੋਂ ਪਵਿੱਤਰ ਬਣੇ ਸੀ ਤੋ ਮਾ ਇਹ ਰੇਟ ਬਾਸ ਆਉਤਦੀ ਹੋਈ ਫਤ ਖੁਦੀਤ ਹੁੰਨ ਕੰਕਈ ਪੱਤਾ ਤੋਂ ਬਲੀਡ ਬਣ ਗਏ ਉਹ ਪੱਤਾ ਤੋਂ ਬਲੀਡ ਕਿਹੜੇ ਬਣੇ ਨੇ ਕਿਹੜੇ ਬਣੇ ਨੇ ਉਹ ਆਦੀ ਸੀਏਟੀ ਲਿਖ ਦੇਖ ਦੇਵੀ ਹਰ ਜਲ ਨਹੀਂ ਮਨ ਆਏ ਤੇ ਲੜਨ ਉਹ ਵਿੱਤਲ ਹੋਏ ਸੋਨੇ ਸਾਰ ਉੱਥੇ ਹੀ ਦੇ ਕੇ ਮਰ ਗਏ ਪਰ ਮਤ ਸੁਣੀ ਪਵਿੱਤਰਤਾ ਹੋਈ ਨਹੀਂ ਉੱਥੇ ਹੀ ਹੋ ਗਏ ਸਾਰੇ ਛੱਡ ਗਏ ਪਵਿੱਤਰ ਹੋਣ ਵਾਲਾ ਸਾਰਾ ਬਹੁਤ ਲੰਮਾ ਪਵਿੱਤਰ ਪਵਿੱਤਰ ਪਵਿੱਤਰ ਤਾਂ ਇਹਦੇ ਤੋਂ ਸਲਾਹ ਬਦਲਦੇ ਜਨਨ ਰਾਹ ਚੱਲਦੇ ਆ ਉਹਨੂੰ ਕੋ ਬੀਚੇ ੜ ਗਿਆ ਚਿੱਤ ਉਹਨਾਂ ਪਵਿੱਤਰ ਹੁੰਦੇ ਪਵਿੱਤਰ ਤੋਂ ਫਿਰ ਪਵਿੱਤਰ ਹੁੰਦੇ ਤੇ ਇਹਦੇ ਨਾਲ ਦੇ ਵਿੱਚ ੜਕਣ ਦੀ ਕੋਈ ਬੁਝਾਇਸੀ ਸੀ ਉਹ ਤਾਂ ਮਾਰਿਆ ਜਿੱਕਾ ਸੱਤੇ ਇੱਕ ਪਾਸੇ ਬੌਂਡੀ ਉੱਤੇ ਪਾਰ ਗਏ ਫਤਤ ਤੋਂ ਪੁੱਛਣ ਕੀਤਾ ਰਣੇ ਰੂਪੀਕ ਕਰਤਾ ਸੁੱਧ ਹੋਈ ਠੀਕ ਹੈ ਜੀ ਗੋਡੇ ਪੂਜਾ ਕਰਦਾ ਪੱਥਰ ਹੈ ਜਿੰਨਾ ਭਰਮ ਕਿਸੇ ਅੰਦਰ ਉਹ ਨਾ ਆਤਮਾ ਹੋ ਅੱਛਾ ਆਤਮਾ ਹੋ ਹਰ ਮਨ ਲਾਗ ਹਰ ਕੈਲੀ ਲਾਗ ਕੋਣ ਕਹਿੰਦਾ ਇਤਨੇ 라ਵਨ ਵਾਲੇ ਨੇ ਨਾ ਇਹ ਫੋਕੇ ਧਰਮਾਂ ਦੂਰੇ ਧਰਮਾਂ ਨੂੰ ਸੋਝ ਦੇ ਲੋਭ ਆਪੀ ਉੱਤੇ ਰਹੋ ਜਦ ਗੁਰਮਤ ਨੇ। ਧਾਰਨ ਕਰਦੇ ਹੀ ਨਹੀਂ ਵਿਚਾਲੇ ਇਹਨਾਂ ਦੇ ਧੋਬੀ ਘੜ ਨਹੀਂ ਜਾਂਦੇ ਇਹ ਤਾਂ ਸਵਾਲਾ ਰੂ ਰਹਿ ਕੇ ਹੁਣ ਉਹ ਸਵਾਲ ਦਾਗ ਜਾਣਗੇ। ਜਿੰਦ ਤੋਂ ਵਾਲਾ ਹੀ ਹੜਦੇ ਤੇ ਓਕੜਾ ਹੜਦੇ ਪੈ ਵਿੱਚ ਗੁਰੂ ਜੜਾਈ ਆ ਪੈਜ ਕਰਕੇ ਗੁੰਝ ਹੋਈ ਔਰ ਬੇਸ਼ਰਮੀ ਪੈਜ ਲਿਆ ਤੇ ਪੱਬਾ ਫੈ ਉੱਗਿਆ ਡਰ ਜਾਏ ਡਰ ਜਾਇਆ ਹੋਏ ਢਰ ਉਰੋ ਹੋਈ ਪਾਗੇ ਜਾਂ ਹੋ ਗਏ ਡਰ ਪਟ ਗਿਆ ਸੁੱਤੇ ਹੀ ਬੁਲੀ ਟਕ ਡਰੇ ਜਾ ਲਾਗੇ ਹਾਂਜੀ 86 ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ ਅੱਠੇ ਗੁਣ ਪ੍ਰਗਟ ਹੋ ਜਾਂਦੇ ਨੇ ਛੱਡਤੀ ਇੱਕ ਹੋ ਗਿਆ ਫੇਰ ਅੱਜ ਛੱਤੀ ਐ ਜੁੜੀ ਹੋਈ ਐ ਉੱਤੀ ਛੱਤੀ ਕਦਾ ਜਾ ਕੇ ਸਰਵਾਂ ਮਨ ਵਾਲੇ ਪਹਿਲਾ ਹੋ ਗਿਆ ਚਾਰੋ ਗੁਣ ਛੱਤ ਦੇ ਚਾਰੋ ਜਿੱਤ ਵਾਲੇ ਕੋਲ ਫਸ ਪੈਣ ਉੱਥੇ 88 ਨਾਲ ਸੱਤੀ ਗਈ ਹੈ 68 30 ਕੀ ਅਗੈ ਦਾ ਮਤਲਬ ਆ ਇਹ ਕਰਦੀ ਹੈ ਉਹਦੀ ਬੋਲਦੇ ਗਵੇਗ ਦੀ ਬੋਲਦਾ ਬੁੱਧੀ ਬਵੇਗ ਹੈ ਕੱਤ ਮਰੂਦੀ ਅੱਜ ਜਖੀ ਸਾਖੀ ਦੇ ਕੋਲ ਰਾਤ ਦੇ ਸੋਤ ਦਾ ਤ੍ਰੇਤੇ ਰਾਤ ਜਗੇਗਾ ਇਹ ਰਾਤਾਂ ਰਾਤ ਦਾ ਉਹ ਹੁੰਦਾ ਜਿਹੜਾ ਲਵਾਈ ਕਰੇ ਬੁੱਧੀ ਅਗਵਾਈ ਕਰ ਰਹੀ ਹੈ ਹੁਣ ਅੱਛਾ ਜੀ ਤੇ ਕਰਮਾਂ ਦੀ ਬੋਲ ਬੁੱਧੀ ਦੁਨੀਆਂ ਨੂੰ ਜੋ ਦੱਸ ਰਹੀ ਹੈ ਕਲ ਦੇ ਰਹੀ ਹੈ ਕੱਬ ਬੁੱਧੀ ਕਰ ਰਹੀ ਹੈ ਉਹ ਦੋਏ ਗੁਪਤ ਨੇ ਸ਼ਕਤੀ ਉਹਾਂ ਦੇ ਪਿੱਛੇ ਕੱਬ ਕਰੇ کیبے او جو انہوں نے بول دیو بھائی ٹھیک ہے کلو جو اک ਦੇ ٹھیک ہے ہون دی جا ہو گئی ہے جے میں بلوندے نی جو بلاو تو نانک دا اس ਦਰਸਲ ਇਹ ਆ ਕੋਈ ਰਾ ਉਸ ਜਰੂਰ نام ਕਹਨੇ ਰਹੇ ਉਹ ਆਪਣੇ ਜਿਹੜਾ ਤੇ ਰਹੀ ਹੈ ਗਵੇਂ ਬੁੱਧੀ ਆਹ ਪ੍ਰਭ ਨੇ ਕੌੜੀ ਨਿਤ ਜਪੀਏ ਸਾਸ ਗਿਰਾਸ ਨਾਮ ਜਪਣਾ ਔਖਾ ਜਪਦੇ ਤੇ ਲੋਕ ਅੱਗੇ ਬੰਦਾ ਰਾਮ ਰਾਮ ਰਾਮ ਕਰਕੇ ਹਲੇ ਹਲੇ ਹਰੇ ਹਰੇ ਕਰਕੇ ਜਪਦੇ ਤੇ ਸਾਸ ਗਰਾਸ ਨਾਲ ਜਪਿਆ ਜਾਂਦਾ ਹੈ ਨਜ਼ਾਬ ਹਾਲ ਨੂੰ ਉਤਾਨੀ ਬੋਲੋਗਾ ਬੰਦ ਨੂੰ ਗਲੀ ਬੋਲੋਗਾ ਜੇ ਉਹ ਰੋਟੀ ਉਪੇਦੀ ਬੋਲੋਗਾ ਸਾਸਰਾ ਸਾਂਭੇ ਜਾਣ ਕੇ ਉਹ ਕਰਕੇ ਹੁਣ ਵੇਲੂ ਆਇਓ ਸਾਸਰਾ ਰੋਟੀ ਫੇਕ ਕੇ ਬੰਦ ਵੇਰ ਕਰੋ ਸਾਸਰਾ ਸਿੱਤਾ ਸ਼ਬਦ ਵਾਸਤੇ ਲਾਈ ਆ ਪਖੰਡੀਆਂ ਵਾਸਤੇ ਨਹੀਂ ਤਾਂ ਆਲਮ ਨਾਬਜਾ ਬਹਿੰਤੇ ਬਣਾ ਜੀ ਨੇ ਹੰਦੇ ਜਪਣਾ ਤਾਂ ਸਾਸਰਾ ਮਤਲਬ ਹੈ ਸਾਸਰਾ ਦਾ ਬੂਝਾ ਜੇ ਸਾਗ ਉਹ ਵੀ ਬੂਝਾ ਜੇ ਰਾਸ ਉਹ ਵੀ ਬੂਝਾ ਉਹ ਨਾਲ ਦਾ ਮਤਲਬੇ ਕੋਈ ਨਹੀਂ ਇਹਦਾ ਮਤਲਬ ਹੈ ਕਰਨ ਨਾਲ ਫਿਰ ਸਰਵਣੀ ਖੀਰ ਪਿਆਇਆ ਦੁੱਧ ਜਿਹੜਾ ਪੀਤਾ ਜਾਂਦਾ ਸੁਣਦੇ ਆ ਕਰਨ ਨਾਲੇ ਸੁਣਦੇ ਆ ਕਰਨ ਨਾਲੇ ਉੱਤਰ ਜਾਂਦੀ ਹੈ ਉਹ ਜਿਹੜਾ ਮੂੰਹ ਨਾਲ ਅੰਦਰ ਲੱਗੇ ਜਾਂਦਾ ਨੇ ਉਹ ਤਾਂ ਇੱਧੇ ਹੀ ਜਾਂਦੀ ਹੈ ਫਿਰ ਬਾਹਰ ਜਨਾ ਸਾਹ ਪੈ ਜੇ ਚੱਟੀ ਹਵਾ ਵਾਂ ਉੱਦ ਲੈ ਜੀਏ ਜਾਂ ਗਿੱਦੇ ਦੇ ਚਲੀ ਜਾਊਗੀ ਬਦਬੂ ਆ ਬਣ ਕੇ ਜੀਊਗੀ ਜਿਹੜੇ ਲੋਕਾਂ ਨੂੰ ਇਨਾ ਗਿਆਨ ਨਹੀਂ ਉਹਦਾ ਸਿੱਖੀ ਦੀ ਅਗਵਾਈ ਕਰਨ ਹੈ ਸਾ ਆਪਣੀ ਆਪਣੀ ਜਗ੍ਹਾ ਜਗ੍ਹਾ ਆਪ ਆਪਣੀ ਜਗ੍ਹਾ ਨਾਲ ਹੱਥ ਪੈਰ ਕਰ ਕੰਭੂ ਸਭ ਚਿੱਤ ਨਰਜਣ ਨਾਲ ਜੋ ਕੰਮ ਕਰਨਾ ਜੋ ਕਰਦਾ ਰਹੇ ਚਿੱਤ ਨਰਜਣ ਠੀਕ ਹੈ ਪਦ ਪਦਕਾਰ ਦਾ ਕੀ ਭਾਵ ਬਣਦਾ ਜੀ ਜਿਹੜਾ ਸਾਰੀ ਸੰਸਾਰ ਦੀ ਪਰਵੇਸ਼ ਕਰਦਾ ਹੈ ਉਹਦਾ ਰਫਾ ਉੱਦੂਦਾ ਹਾਂ ਉਹ ਦੂਦਾ ਹਾਂ ਜਿਸ ਨੂੰ ਕਰੇ ਰਹਿਮ ਤਿਸ ਨਾ ਵਿਸਾਰਦਾ ਰਾਗੁਲੀ ਹੈ ਰਹਿਮ ਦਾ ਅਸਲੀ ਟਿੱਪੀ ਲਈ ਹੋਈ ਹੈ ਇਹਨਾਂ ਦੇ ਘਰ ਇਸ ਨੂੰ ਕਰ ਰਹਿੰ ਮੈਂ ਇਹ ਮਨੋ ਪਸਾਰਦਾ ਫਿਰ ਕਿ ਪਸਾਰੂ ਆਪ ਉਪਾਵਨ ਆਪ ਹੀ ਮਾਰਦਾ ਮਨ ਨੂੰ ਆਪੇ ਪੈਦਾ ਕਰਦਾ ਆਪ ਹੀ ਤੂੰ ਸਮਝਾਉਂਦਾ ਹੈ ਬਾਹਰ ਨਾਲ ਸਮਝਾਉਣਾ ਹੀ ਕਰਦਾ ਪੈਦਾ ਕਰਦਾ ਕਰਦਾ ਨਾਲ ਦੇਖ ਕਥਾ ਨਾਲ ਸੁਣਨ ਗਿਆਨ ਲੈ ਕਾਟਾ ਪੂਰਾ ਕਰੀਏ ਕਥਾ ਨਾਲ ਪੜ੍ਹ ਗ੍ਰੰਥ ਪੜਨਾ ਨਾਲ ਸੂਝ ਸਮਝ ਜੀਵ ਨਾਲ ਚਰਚਾ ਕਰ ਸ਼ਬਦ ਵਿਚਾਰ ਕਰ ਇਹ ਘਾਟਾ ਪੂਰਾ ਕਰੀਏ ਇਸੇ ਕੋਈ ਹੋਰੇ ਕਰਨ ਲੱਗ ਗਿਆ ਟੈਲੀਵਿਜ਼ਨ ਆ ਗਈਆਂ ਇਦਾਂ ਕਰ ਨੂੰ ਵੇਹਲੇ ਸੀ ਨਾ ਤੇ ਹਰ ਨੂੰ ਚੁੱਪ ਕਰਾਉਣ ਦੇ ਦਿਲ ਇੱਛਾਵਾਂ ਪੈਦਾ ਹੁੰਦੀਆਂ ਨੇ ਇੱਛਾਵਾਂ ਬਹੁਤ ਜ਼ਿਆਦਾ ਮਾਇਆ ਦੀ ਮਾਇਆ ਦੇ ਇੱਛਾ ਪੈਦਾ ਨਾ ਹੋਵੇ ਬੰਦੇ ਦੇ ਵਿੱਚ ਇਸ ਤੋਂ ਖੁਦ ਆਪ ਪਾਵਨ ਹਾਰ ਮਾਰਦਾ ਤੇ ਆਪ ਕੌਣ ਹੈ ਜੀ ਇੱਥੇ ਮਾਰਦਾ ਹੁਕਮ ਦੀ ਉਹ ਨਹੀਂ ਇੱਥੇ ਬੁਲਬੁਦੀ ਉਹ ਕੋਣ ਮਾਰਦੀ ਜਹਾਜ਼ ਹੈ ਉਹ ਕੋਣ ਇੱਕ ਹੈ ਜਹਾਜ਼ ਹੈ ਉਹਦੇ ਵਿੱਚ ਬਿਠਾਉਣ ਵਾਸਤੇ ਸਾਨੂੰ ਬਨੇ ਬਣਾਉਂਦਾ ਇਤਨਾ ਜਨ ਬੰਨ ਵਰਦਾਨੀ ਇਤਨਾ ਜਨ ਬੰਨ ਗਾਰੀ ਬੈਠੇ ਨੇ बैठणो मंडेया ने हुकदे पाणे विच चलण ही मननो चाहिदा आपे ही मारदा ज्यादा सी कह देदा ता कित्त दी ओ गल है ठीक है जी सब किस जाने, जाने। जान जा सब ने ने पता। सब पता है जान बुद्ध विचार दा बुद्धि दा जे विचार दा फिर सारा को ਬੁੱਧਣਾ ਵਿਚਾਰਦਾ ਜਾਂ ਬੁੱਧਣਾ ਵਿਚਾਰਦਾ ਫਿਰ ਬੁੱਝ ਲਿੰਦਾ ਵਿਚਾਰਦਾ ਉਹ ਨਾਲ ਚੱਲ ਉਲਟੇ ਰਾਹ ਠੀਕ ਹੈ ਜੀ ਸਭ ਕਿਸ ਜਾਣੇ ਜਾਣ ਬੁੱਝ ਵਿਚਾਰ ਦਾ ਅਨੇਕ ਰੂਪ ਖਿੰਮਾਹੇ ਕੁਦਰਤ ਧਾਰ ਦਾ ਜੇਦਾ ਰੂਪ ਧਾਰ ਕਰਦਾ ਹੈ ਬੁਰ ਬੁਰ ਜਾਂ ਦੇਖਦਾ ਦੁੱਕਰ ਜਾਂ ਦੇਖਦਾ ਦੁੱਕਰ ਜਾਂ ਦੇਖਦਾ ਉਹ ਜਾਣਦਾ ਹੈ ਰੂਪ ਨਹੀਂ ਹੈ ਠੀਕ ਹੈ ਜੀ ਕੁਦਰਤ ਧਾਰ ਦਾ ਕੁਦਰਤ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਕੁਦਰਤ ਦੇ ਪ੍ਰਭਾਵ ਥਲੇ ਦਾ ਹੈ ਉਹ ਦੇਖ ਕੇ ਦੇਖ ਰੂਪ ਝਾੜਦਾ ਹੈ ਮੈਂ ਮਤਲਬ ਜਿਹੜੀ ਬਾਹਰ ਬਨਸਪਤੀ ਹੈ ਸਾਰਾ ਕੁਝ ਉਹਨੂੰ ਉਹਦੀ ਗੱਲ ਹੈ ਕੁਦਰਤ ਉਹਨਾਂ ਜੋ ਤੀਜਾ ਉਹ ਕੁਦਰਤ ਹੈ ਕੁਦਰਤ ਦੇਛਾ ਜੋ ਦੀਨਾ ਕੁਦਰਤ ਉਹਦਾ ਪ੍ਰਭਾਵ ਪੈਂਦਾ ਹੈ ਠੀਕ ਹੈ ਜੀ ਕੋਲ ਕਰਕੇ ਕਈ ਰੂਪ ਕੋਈ ਇਸ ਤਕੜਾ ਕਰ ਲੈਂਦਾ ਹੈ ਕਰਦੇ ਢਾਲ ਲੈਂਦਾ ਤਕੜਾ ਕਰ ਲੈਂਦਾ ਠੀਕ ਹੈ ਜੀ ਰਜੋ ਸਮੋਸਾ ਤੋਂ ਦੇ ਵਿੱਚ ਰਹਿੰਦਾ ਠੀਕ ਹੈ ਜੀ ਜਿਸ ਨੂੰ ਲਾਏ ਸਤਿ ਸੈ ਉਧਾਰਦਾ ਇਹਨੂੰ ਸੱਚੇ ਵਾਲੇ ਪਾਸੇ ਲਾ ਦੇ। ਇਹ ਤਾਂ ਕੋਦਰ ਤਾਲੇ ਪਾਸੇ ਲੱਗਿਆ ਰਹੇ ਕਦੇ ਸੱਚ ਕਦੇ ਕੋਦਰ। ਦੋਹੀ ਪਾਸੇ ਲੱਗਿਆ ਰਹੇ ਜੇ ਤਾਂ। ਹੂੰ। ਫੇਰ ਤਾਂ ਰੂਪ ਢਾਲਦਾ। ਫੇਰ ਤਾਂ ਰਿਕਾ ਠੀਕ ਹੈ ਜੀ। ਇਹ ਸੱਚਾ ਪਾਸੇ ਜੁੜ ਜਵੇ। ਉੱਤਰਾਧਾਣ ਵਾਲੇ ਜੁੜ ਜਵੇ। ਫੇਰ ਫਾਰਜੰਟ। ਫੇਰ ਉਹ ਜਲ ਬੀਗਿਆ। ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦਿਵਾਨ ਹੈ ਹਉ ਤਿਸ ਨਮਸਕਾਰ ਦਾ ਜਿਦੇ ਉਹ ਬਾਰੇ ਜੀ ਦੇ ਵੱਲ ਹੋਵੇ ਉਹ ਹਰ ਕਦੇ ਜਊ ਆਹ ਹਾਰ ਜਿੱਤ ਵਾਲੀ ਗੱਲ ਕਿਉਂ ਆ ਗਈ ਗੁਰਬਾਣੀ ਚ ਗੁਰੂ ਤਾਂ ਕਹਿੰਦਾ ਲੜਾਈ ਨਹੀਂ ਬਸ ਉਹ ਤਾਂ ਲੜਾਈ ਨਹੀਂ ਕਦੇ ਉਹ ਕਹਿੰਦਾ ਹਮਲਾ ਝਗੜਾ ਰਹਾ ਮੇ ਕੋਲ ਫਰਤ ਬੁੱਲਣਾ ਤੂੰ ਠੀਕ ਹਾਰ ਵਾਲੀ ਗੱਲ ਵੀ ਆ ਗਈ ਜਿੱਤ ਹਾਰ ਵਾਲੀ ਗੱਲ ਕਹ ਕੇ ਆ ਗਈ ਉਹ ਜੱਟ ਜੱਲਾਂ ਆਉਂਦੇ ਨੇ ਅੱਛਾ ਸ਼ਰਵਣ ਆਉਂਦੇ ਰੇ ਉੱਪਰ ਅਧੀ ਜੋ ਕੋ ਜੱਟ ਅਗਲ ਦੇ ਬੂਆ ਠੀਕ ਹੈ ਸ਼ਰੀਰ ਤੇ ਬੈਨਾ ਪਰ ਹਾਰ ਕੇ ਜਾਂਦੇ ਨੇ ਉਹ ਦਿੱਕ ਦੇ ਦੀ ਜਦੇ ਜਦੇ ਜਿਹਦੇ ਬਲ ਸੱਚਾ ਉਹ ਮੈਂ ਹਾਰ ਉਹ ਝੂਠੇ ਆਉਂਦੇ ਨੇ ਆਪਣਾ ਘਰ ਬਚਾਉਣ ਕਰਕੇ ਦੁਨੀਆ ਉਹਨਾਂ ਦੇ ਜ਼ਮੀਰ ਹਿਲਦੀ ਆ ਜਸ ਟੁੱਟਿਆਂ ਦੀ ਨਾਲੋਂ ਲੋਕ ਟੁੱਟਦੇ ਨੇ ਉਦੋਂ ਵੀ ਆ ਕੇ ਪੁੱਛਦੇ ਨੇ ਫਿਰ ਉਹ ਕਿਆ ਕਿਆ ਗੱਲਾਂ ਹੁੰਦੇ ਨੇ ਉਹ ਸੱਚ ਹੋਵੇ ਕਦੇ ਆ ਰਿਹਾ ਹੋਰ ਉਹ ਕਿਹੜਾ ਜੂਆ ਖੇਡਦੇ ਨੇ ਗਿਆਨ ਦੀ ਗੱਲ ਹੈ ਜੀ ਗਿਆਨ ਦੀ ਗੱਲ ਗਿਆਨ ਕਿੱਅਕੱਜ ਕਦੇ ਜੀ ਹਵੇ ਠੀਕ ਹੈ ਜੀ ਸਦਾ ਅਪਗ ਦੀ ਬਾਣ ਹੈ ਹਉ ਨਮਸਕਾਰ ਦਾ ਉਹ ਜਿਹੜਾ ਦੀਵਾਨ ਦੇ ਸਦਾ ਭਾਗ ਹੈ ਭਾਗ ਦੇ ਵਿੱਚ ਭਾਗ ਦਾ ਇੱਕੋ ਹੀ ਅਵਸਥਾ ਰਹਿੰਦੀ ਹੈ ਅਵਸਥਾ ਉੱਚੀ ਦੀ ਵੀ ਦੀ ਹੈ ਜਿਹੜਾ ਬਈ ਕੋਈ ਗੱਲ ਪੁੱਛ ਲਈ ਕਹਿੰਦਾ ਵੀ ਦਿਨ ਕਿਤਾਬਾਂ ਪੜ੍ਹ ਕੇ ਹੋச்சு ਉਹ ਦੀਵਾਨ ਆ ਹੈ ਫਿਰ 4-10 ਦਿਨ ਬਾਅਦ ਕਹਿੰਦਾ ਲੱਗਿਆ ਹੀ ਨਹੀਂ ਕਿ ਜਦ ਮੈਨੂੰ ਪਤਾ ਨਹੀਂ ਜਿਹੜੀ ਕਿਤਾਬ ਚ ਪੜ੍ਹਿਆ ਸੀ ਕਿ ਉਹ ਦੀਆਂ ਲਾਂਦ ਹੈ ਕਿ ਜਿਹੜਾ ਭਾਗਤ ਬਾਅਦ ਅੱਧੀ ਗੱਲ ਪੂਝ ਉਸ ਦਾ ਜਵਾਬ ਪਹਿਲੇ ਆ ਜਾਂਦਾ ਪਤਾ ਨਹੀਂ ਕੀ ਬੋਲਣਾ ਘਟ-ਘਟ ਕੇ ਅਸਰਜੀ ਜਨਸਰਨ ਉਹਦਾ ਕਈ ਵਾਰ ਬੋਲਣ ਦੇ ਪਹਿਲਾਂ ਹੀ ਪਤਾ ਹੁੰਦਾ ਵੀ ਇਹ ਜਵਾਬ ਕੀ ਕੱਢਿਆ ਜਿਹਾ ਪੂਰੇ ਫਿਕਰੇ ਦਾ ਉਹ ਜਦੇ ਦਾ ਅਸਰ ਮੈਂ ਸਮਝ ਗਿਆ ਤੂੰ ਕੀ ਕਹਿਣਾ ਤੂੰ ਕੇ ਜਵਾਬ ਸੁਣ ਕੇ ਜਾ ਮੈਂ ਨਮਸਕਾਰ ਕਰਦਾ ਜੀਦਾ ਦਵਾਨ ਅੱਪਾ ਦੀਵਾਨ ਦਾ ਭਾਵ ਹੈ ਕਿ ਦੀਵਾਨ ਉਹਦਾ ਕਿਤੇ ਕੁਝ ਸ਼ਬਦ ਬੈਠੀ ਹੋਵੇ ਠੀਕ ਹੈ ਜੀ ਸਾਰੇ ਸ਼ਬਦ ਬੈਠੀ ਆ ਉਹ ਸਾਰੇ ਇੱਕੋ ਜਿਹੇ ਲੈਵਲ ਤੇ ਬੈਠੇ ਉਹ ਦੀਵਾਨ ਦੇ ਵਿੱਚ ਹੈ ਮਤ ਭੇਗਦੀ ਹੁੰਦਾ ਹਮੇਸ਼ਾ ਇਹ ਹੋ ਜਾ ਤਾਂ ਪੰਗ ਹੋ ਜਾ ਪੰਗ ਪੰਗ ਲਗਦਾ ਦਾ ਅਭਾਗ ਉਲਟ ਹੈ ਕਿ ਕੇ ਸੱਚਾਈ ਗੱਲ ਹੈ ਫਿਰ ਓਹ ਅੱਜਾਂ ਦੀ ਗੱਲ ਐ ਅੱਭਾਗੋ ਉਹ ਪੱਗੋ ਹੋ ਗਿਆ ਉਤਕੋ ਹੋ ਗਿਆ ਤੋਦਾ ਘੜੀ ਹੋ ਗਈ ਉਸੇ ਕਿਸਮ ਦੁਬਧਾ ਨਹੀਂ ਕਿ ਸਭ ਸਭ ਨੇ ਗੱਲ ਐ